हां जी हां जी श्लोक डखणे लगड़ियां प्रियन फेखंदियां ना तृपियां हब मजाहू सौतणी बीया ना कोई लगड़ियां प्रियन जड़ी अपने पति ते कैड़ो ते पति ते जुड़ीया हुजी दे फेखंदियां आन तृपियां ओ देखदे किते पति ਸਦਾ ਹੀ ਤੱਕਦਿਆਂ ਰਹਿੰਦੀਆਂ ਨੇ ਜਿਵੇਂ ਚਕੋਰ ਚੰਨ ਨਾਲ ਚੱਕ ਸੂਰਜ ਨਾਲ ਨਹੀਂ ਦਾ ਰਜਦੀ ਐ ਨਹੀਂ ਰਜਦੀ ਉਹ। ਕ੍ਰਿਪਤ ਨਹੀਂ ਹੋ ਰਹੀ ਦਰਸ਼ਨ ਤੋਂ। ਹੱਬ ਮਜਾਉ ਸੋਤਣੀ ਸਾਰਿਆਂ ਦੇ ਵਿੱਚ ਹੀ ਹੈ ਉਹ ਤੜੀ ਤਾਂ ਪੈਸੇ। ਜੀ ਕੋਈ ਦੂਸਰਾ ਕੋਈ ਨਹੀਂ ਹੈ ਕਿਸੇ ਦੇ ਹੱਥ ਕਿ ਉਹ ਉਹਦੀ ਸ਼ਕਲ ਸੂਰਤ ਕਦੇ ਵੀ ਕਿਸੇ ਨੇ ਦੂਜੀ ਨਹੀਂ ਦੱਸੀ। جے کسے نظر شروع کیتا اے کوئی شکل صورت دسی اے او کی آ خال مورت خال مورتے دسے جو جی محلہ پنجمہ کٹھڑیاں سنتاں ਜਿਨ੍ਹਾਂ ਨੇ ਇਹ ਰਸਤਾ ਅਪਣਾ ਲਿਆ ਪੰਧੀਆਂ ਇਹ ਰਸਤੇ ਚੱਲ ਪਈ ਉਹ ਜਿਹੜੀ ਉਹਨਾਂ ਨੂੰ ਸੁੱਖ ਮਿਲ ਗਿਆ ਉਸ ਵੀਰ ਕੋਈ ਸੁਖੀ ਹੋਈ ਨਹੀਂ ਤੇ ਬਾਕੀ ਕੋਈ ਨਹੀਂ ਸੁਖੀ ਹੋਇਆ ਕਥੜੜੀਆਂ ਸੰਤਾ ਸੰਤਾ ਨੇ ਜੋ ਕਥਨ ਕੀਤੀਆਂ ਤੇ ਗੱਲਾਂ ਜਿਹੜਾ ਉਹ ਪੰਧ ਰਸਤਾ ਅਪਣੋਰ ਵਾਲਿਆਂ ਨੇ ਉਹਨਾਂ ਨੂੰ ਇਹ ਸੁੱਖ ਹੋਇਆ ਜਿਹੜੀ ਬੁੱਧੀ ਨੇ ਗੁਰਕਾ ਮਾਰਗ ਅਪਣਾਇਆ ਗੁਰਬਾਨੀ ਦਾ ਰਸਤਾ ਅਪਣਾਇਆ ਉਹਦੇ ਉੱਤੇ ਸੁਖ ਹੋਇਆ ਬਲਣਾ ਸੁੱਕੇ ਸੇ ਡੂੜੀ ਹੋਇਆ ਕਈ ਕੋਈ ਕੁਝ ਆਵੇ ਉਹਨਾਂ ਅੱਛਾ ਜੀ ਸੰਤਾਂ ਦਾ ਕੀਪਾ ਬਣਦਾ ਸੰਤਾਂ ਦੇ ਨਾਂ ਹਾਂ ਬਹੁਤ ਜਨ ਹੈ ਸੰਤਾਂ ਸੱਤਾਂ ਕਥਾਵਾਂ ਕਥਣ ਸੰਤਾਂ ਦੇ ਕਥਨ ਲੈਣਾ ਜਿਹੜੀ ਗੁਰਬਾਨੀ ਹੈ ਠੀਕ ਹੈ ਜੀ ਹਰ ਕਥਾ ਸੰਤਾਨ ਲਈ ਜਿਹੜੀ ਇਹ ਕਥਾ ਹੈ ਇਹ ਉਹ ਜਿਹੜੇ ਮਾਰ ਗਏ ਇਸ ਮਾਰਗ ਤੇ ਚੱਲੀਆਂ ਨੇ ਜਿਹੜੀ ਉਹ ਰੂਹਾਂ ਪਰਮ ਸੁਖ ਨੂੰ ਪਰਮ ਅਨੰਦ ਨੂੰ ਪ੍ਰਾਪਤ ਹੋ ਹੈ ਜੀ ਲੱਭਿਆ ਕੁਰਬਾਨੀ ਚੋਂ ਜਿੰਨਾ ਦੇ ਭਾਗ ਵਿਥਾੜੇ ਸਭ ਨੇ ਭਾਗ ਆਪਣਾ ਦੇਖ ਕੇ ਚੱਲੀਆਂ ਨੇ ਕਿ ਐ ਤੋ ਅਗੜੂ ਐ ਤੋ ਆਗੜੂ ਉੱਠੇ ਰਸਤੇ ਔਰ ਸਿੱਧੇ ਰਸਤੇ ਦਵਾਨ ਅੱਗੇ ਕੇ ਚੱਲਿਆ ਗੁਰਬਾਣੀ ਦੋਏ ਦਸੇ ਐਧਰ ਨੇ ਦੋਏ ਔਗਣਾ ਅਲਗਣਾ ਦੇ ਦੋਏ ਰਸਤੇ ਅੱਗੇ ਰੱਖ ਕੇ ਚੱਲੇ ਨੇ ਉਹ ਔਗਣਾ ਤੋਂ ਡਰਦੇ ਔਗਣਾ ਵੱਲ ਨਹੀਂ ਗਏ ਗੁਣਾ ਵੱਲ ਗਏ ਜਿਨ੍ਹਾਂ ਨੇ ਇੱਕ ਰਸਤਾ ਗਾਇਬ ਕਰਤਾ ਫਰਵਾਇਆ ਨਹੀਂ ਕੀਤੀ ਉਹਨਾਂ ਨੇ ਕੀ ਕੀਤਾ ਬਣ ਜਾਣ ਤੋਂ ਸਭ ਬਾਤ ਜਾਣਦੇ ਹੀ ਓਗਣ ਕਰੇ ਜਾਣਦਾ ਓਗੜੂ ਫਿਰ ਵੀ ਕਰਦਾ ਲੱਦਣੀਆਂ ਤਿੰਨ ਇਹ ਕਹਿੰਦੇ ਹਾਂ ਉਹਨਾਂ ਨੂੰ ਆ ਸਮਝਾਈ ਗਿਆ ਲਦੜੀ ਭਾਗ ਮਠਾਹੜੇ ਕਾਫੀ ਵਾਰ ਆਉਂਦਾ ਜ਼ਿਕਰ ਇਸ ਵਾਰ ਮਹੱਲਾ ਪੰਜਵਾਂ ਡੂੰਗਰ ਜਲਾ ਤਲਾ ਊਮ ਬਨਾ ਫਲਕੰਦਰਾ ਪਾਤਾਲਾਂ ਆਕਾਸ਼ ਪੂਰਨ ਹੱਬ ਘਟਾਂ ਨਾਨਕ ਪੇਖੀ ਜਿਉ ਇਕਤ ਸੂਤ ਪਰੋਤੇ ਆ ਡੁੰਗਰ ਜਲਾ ਦੇ ਵਿੱਚ ਜਿੱਥੇ ਜੀਵ ਦੇ ਖਲਾ ਦੇ ਵਿੱਚ ਧਰਤੀ ਵਿੱਚ ਪੀਰ ਅੰਦਰਾਲ ਵਿੱਚ ਪਹਾੜਾਂ ਦੀਆਂ ਕਰਤਾਰਾਂ ਦੇ ਵਿੱਚ ਵੀ ਦੇ ਦੇ ਵਿੱਚ ਵੀ ਪੂਰਨ ਹੱਬ ਘਟਾ ਸਾਰੇ ਘਟਾਂ ਦੇ ਵਿੱਚ ਪੂਰਨ ਪਰਮੇਸ਼ਰ ਵਿਆਪਕ ਪੂਰਾ ਕਰਨ ਵਾਲਾ ਸਭ ਦਾ ਗਿਆਨ ਪੂਰਾ ਕਰਨ ਵਾਲਾ ਕੋਈ ਕਿਤੇ ਵੀ ਹੈ ਜਾਈ। ਨਾਨਕ ਪੇਖੀ ਜਿਉ 13 ਸੂਤ ਪਰੋ ਧਿਆਨ ਉਹ ਕਹਿੰਦਾ ਬੈਗੀ ਪੇਖਿਆ ਸਾਰੇ ਜੀ ਕੋਈ ਸੂਤ ਪਰੋਏ ਹੋਏ ਦੇ ਕੇ ਹੁਕਮ ਦੇ ਵਿੱਚ ਪਰੋਏ ਹੁਕਮ ਦੇ ਬੱਦੇ ਦੇ ਜੀ ਸਭ ਨੂੰ ਕੋਈ ਹੁਕਮ ਦੇ ਨਾਲ ਦੇ ਰਿਹਾ ਹੋ ਗਿਆ ਸਭ ਨੂੰ ਪੂਰਣ ਕਰ ਰਿਹਾ ਹੈ ਕਰ ਗਿਆ ਸਭ ਨੂੰ ਗੁਰਮੁਖਾਂ ਦਾ ਫੈਸਲਾ ਹੈ ਜੀ ਬਿਲਕੁਲ ਬਿਲਕੁਲ ਸੌੜੀ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਪਿਤਾ ਵੀ ਹਰ ਜੀ ਹੋਇਆ ਮਾਤਾ ਵੀ ਹਰ ਜੀ ਹੋਇਆ ਪ੍ਰਤਪਾਲ ਕਰਨਾ ਵੀ ਹਰ ਜੀ ਹੋਇਆ ਉਹ ਜਿਹੜੇ ਤਿਰ ਬਣਾਏ ਤੇ ਬ੍ਰਹਮ ਵਿਸ਼ਨੂੰ ਸ਼ਿਵ ਜੀ ਤਿਰ ਹੀ ਘੜ ਦਿੰਦੇ ਇੱਥੇ ਹਰ ਮੇਰੀ ਸਾਰ ਕਰੇ ਕੋਈ ਮੇਰੀ ਹਰ ਬਲ ਕਿਰਤਾ ਰੱਖਦਾ ਵੇਰੀ ਚੰਤਾ ਹਰ ਵਕਤ ਉਹਨੂੰ ਘਮ ਹਰ ਕੇ ਬਾਲਕ ਅਸੀਂ ਘਮ ਕੇ ਬਾਲਕ ਜਉਦੇ ਹੋਏ ਬਾਲਕਾ ਵੀ ਚਿੰਤਾ ਰੱਖਦਾ ਹੀ ਉਹ ਮੈਂ ਪਿਓ ਬਾਕਾ ਪਿਤਾ ਹੋ ਜੀ ਸਹਜੇ ਨਹੀਂ ਕਰਦਾ ਆਲਕ ਔਗਣ ਕੋ ਨਾ ਚਿਤਾਰਦਾ ਗੱਲ ਸੇਤੀ ਲਾਇਕ ਸਹਜੇ ਸਹਜ ਖਿਲਾਇੰਦਾ ਉਹ ਬੜੇ ਆਰਾਮ ਨਾਲ ਤੇ ਖਰੇ ਤੇਰੀਆਂ ਵਸਤਾਂਾਂ ਨੂੰ ਖਲਾਉਂਦਾ ਹੈ ਸਹਜ ਗਿਆਨ ਦਿੰਦਾ ਸਹਜ ਟਿਕਾਉਂਦਾ ਹੈ ਆਪ ਦਾ ਟਿਕਿਆ ਹੋਇਆ ਹੈ ਸਾਰਿਆਂ ਨੂੰ ਦੇ ਬਲ ਨੂੰ ਟਿਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਖਲਾਉਂਦਾ ਅਖੀਰ ਵੀ ਖਲਾ ਰਿਹਾ ਹੈ ਦੇ ਵਿੱਚ ਵੀ ਕੁਝ ਕਰ ਦੂਗੀ ਸਾਡੀਆਂ ਡਿਊਟੀਆਂ ਦਾਈਆਂ ਨੇ ਸਹਜ ਅਵਸਥਾ ਵੀ ਦੇ ਰਿਹਾ ਹੈ ਉਦਰਾ ਉਤਰਾਤ ਬਣ ਕੇ ਜੋ ਈ ਕਰਦਾ ਹਾਲ ਕਦੇ ਵੀ ਹਾਲਸ ਨਹੀਂ ਕਰਦਾ ਆਪਣੀ ਡਿਊਟੀ ਤੋਂ ਹੀ ਅੱਕ ਦੱਸਦੇ ਹਾਲ ਕਾਲਸ ਅੱਛਾ ਜੀ ਠੀਕ ਹੈ ਜੀ ਉਗਣ ਕੋਲ ਨਾ ਚਿਤਾਰ ਦਾ ਕਲ ਸੇਤੀ ਲਾਇਕ ਉਹ ਤਾਂ ਗੱਲ ਲਾ ਕੇ ਰੱਖਦਾ ਜੇ ਕੋਈ ਸਾਡੇ ਚ ਬੁਰਾਈ ਹੈ ਦੋ ਵੀ ਬੁਰਾਈ ਹੁਣ ਵੀ ਹੈ ਉਹ ਚਿਤਾਰ ਦਾ بیوی ਤੇਰੇ ਤਾਂ ਉਗਣ ਦੋ ਕੋਈ ਨਹੀਂ ਛੱਡ ਦੂਗਾ ਹਲੇ ਲੈਣ ਠੀਕ ਹੋ ਜੂ ਆਪ ਆਪਣਾ ਕਾਬਿਲ ਨੂੰ ਸਮਝਾਉਣਾ ਹੀ ਕੋ ਸਮਝੋ ਦੇ ਤਾਂ ਸਮਝੂਗਾ ਜਾਂ ਸਮਝਾਵੋਗੇ ਸੁਧਜੂਗਾ ਹਾਂਜੀ ਮੂੰਹ ਮੰਗਾ ਸੋਈ ਦੇਵਦਾ ਹਰ ਪਿਤਾ ਸੁਖਦਾਇਕ ਗਿਆਨ ਰਾਸ ਨਾਮ ਧੰ ਸੰਪੀਉਣ ਇਸ ਸੌਦੇ ਲਾਇਕ ਕੋਈ ਬਗਲਾ ਜੋ ਬਗਲਾ ਸੋਈ ਦੇਂਦਾ ਉਹੀ ਦੇ ਦਿੰਦਾ ਹਰ ਪਿਤਾ ਸੁਖਦਾਇਕ ਉਹਨੇ ਐਂ ਲੱਗਦਾ ਬਈ ਜੋ ਬਗਲਾ ਉਹੀ ਦੇ ਦਿੰਦਾ ਜੇ ਨਾ ਵੀ ਗਿਆਨ ਦੇ ਰੂਪ ਦਾ ਕੋਈ ਬੁੱਧਾ ਔਰ ਬੁੱਧਾ ਕਹਦਾ ਜਦੋਂ ਬੁੱਧੇ ਕੋਜੀ ਖੋਜ ਹੀ ਖੋਜ ਕਰਦੇ ਨੇ ਜੋ ਖੋਜੀ ਖੋਜ ਦੇ ਵਿੱਚ ਗਿਆਨ ਬੁੱਧਦਾ ਉਹ ਗਿਆਨ ਉਹ ਗੱਲ ਇੱਥੇ ਗਿਆਨ ਦੀ ਚਲਦੀ ਹੈ ਠੀਕ ਹੈ ਜੀ ਗਿਆਨ ਰਾਸ ਨਾਮ ਤਨ ਸੰਪੂਰਨ ਲਾਇਕ ਗਿਆਨ ਰਾਸੀ ਦੇਤੀ ਲੋਭ ਕੰ ਦੇ ਤਵੇ ਨੂੰ ਸੋਗ ਜੋੜ ਗਿਰੂ ਇਲਾਵੇ ਤੂੰ ਸੰਭਾਲ ਲਗਾ ਹਾਂ ਸੌਦੇ ਲਾਇਕ ਸਮਝ ਕੇ ਮੈਨੂੰ ਸੰਭਾਲਿਆ ਜਿਹੜਾ ਲਾਇਕ ਆ ਉਹਨੂੰ ਸੰਭਾਲ ਦਿੰਦਾ ਸਮਝਿਆ ਤਾਂ ਸੰਭਾਲਤਾ ਤੋ ਵੱਡੇ ਵੀ ਤਾਂ ਸੀਗੇ ਇੰਨੇ ਲਾਇਕ ਵੀ ਸੀ ਦਾ ਲਾਇਕ ਕਾਦੀ ਕਹਿ ਸਕਦੇ ਉਹਨਾਂ ਨਾਲ ਉਹ ਲਾਇਕ ਸੀ ਬਸ ਠੀਕ ਹੈ ਜੀ ਸਾਂਝੀ ਗੁਰ ਨਾਲ ਬਹਾਲਿਆ ਸਰਬ ਸੁਖ ਮੈਂ ਨਾਲੋਂ ਕਦੇ ਨਾ ਵਿਛੜੈ ਹਰ ਪਿਤਾ ਸਭ ਨਾਲ ਗੱਲਾਂ ਲਾਇਕ ਹਾਂਜੀ ਗੁਰਮਾਲ ਬਹਾਲਿਆ ਗੁਰਦੇ ਨਾਲ ਬਹਾਲਿਆ ਬਹਾਲਿਆ ਸਾਂਝ ਕਰ ਲਈ ਉਹਨੂੰ ਸਾਜਾ ਕਰੇ ਕਬੀਰ ਸਿੰਘ ਹਰਿਸ਼ੰਗਰ ਚ ਕਰੇ ਹਰਦੇ ਨਾਲ ਸਾਂਝ ਪਾ ਕੇ ਹਰ ਬਲਾਉਂਦਾ ਤੇ ਹਰ ਲੈ ਕੇ ਨਾਮ ਦਿੰਦਾ ਦਰਗਾਹ ਤੋਂ ਸਤਗੁਰ ਨਾਮ ਦਿੰਦਾ ਦਰਗਾਹ ਤੋਂ ਲੈ ਕੇ ਸਤਗੁਰ ਨੂੰ ਸੁਣਦੀ ਹੈ ਦਰਗਾਹ ਦੀ ਗੱਲ ਇਹਨੂੰ ਉਹ ਇਹ ਬੁਲਾਉਂਦਾ ਫਿਰ ਵੀ ਇਹ ਬੋਲ ਇਹ ਦੋਏ ਫਿਰ ਮਿਲ ਕੇ ਬੋਲਦੇ ਨੇ ਤਾਂ ਤੇ ਜਨਾਬੇ ਨੂੰ ਹਰਜਾ ਸਿਕਾਇਓ ਸਰਬ ਸੁਖ ਪਾਇਕ ਇਸ ਤਰੀਕੇ ਨਾਲ ਸਾਰੇ ਸੁੱਖਾਂ ਦੀ ਪ੍ਰਾਪਤ ਹੋ ਗਈ ਮੈਂ ਨਾਲੋਂ ਕਦੇ ਨਾ ਮੇਰੇ ਨਾਲੋਂ ਕਦੇ ਨਹੀਂ ਵਿਛੜਦਾ ਹਰਪ੍ਰਤਾ ਸਭਨਾ ਕੱਲਾ ਨਾ ਇੱਕ ਉਹ ਜਿਹੜਾ ਹਰਪ੍ਰਤਾ ਸਭਨਾ ਗੱਲਾਂ ਦੇ ਵਿੱਚ ਲਾਇਕ ਹੈ ਉਹ ਕਦੇ ਵੀ ਨੂੰ ਕੱਲਾ ਛੱਡਦਾ ਕਦੇ ਵੀਰੇ ਨੂੰ ਵਿਛੜਦਾ ਨਹੀਂ ਠੀਕ ਹੈ ਜੀ ਇੱਥੇ 21ਵੀਂ ਪੌੜੀ ਦੀ ਸਮਾਪਤੀ ਹੈ ਜੀ